शलोक महल्ला तीसरा सावनि सरसी कामणी गुरु शब्दी विचार नानक सदा सुहागणी गुरु अपार सावन सरसी कामणी उठे भी आया है सावन दे बेटे के परवा सावन सरसी कामणी क्या लगा कौन से पे आ रहा सावन सरसी कामणी गुरु ਤਾਲੇ ਰੀ ਉਹਦਾ ਬਣ ਗਈ ਸਾ ਬਣੀ ਉਸੇ ਦਾ ਰੂਪ ਬਣ ਗਿਆ ਆਪਣੇ ਮੂਲ ਵਰਗੀ ਹੋ ਗਈ ਸਰਥੀ ਜਦ ਰਸ ਆ ਗਿਆ ਨਾ ਕਾਮਲੀ ਰੂਪ ਆਉਣਾ ਸੀ ਇਹਦੇ ਵਿੱਚ ਉਹ ਨਾਮ ਦੀ ਕਾਮਨਾ ਹੋਈ ਰਸ ਆਇਆ ਨਾਮ ਦਾ ਆਪਣੇ ਮੂਲ ਵਰਗੀ ਹੋ ਗਈ ਬਿਲਕੁਲ ਕੋਰ ਵਿਚਾਰ ਆ ਕੋਰ ਸ਼ਬਦ ਦਾ ਜਿਹੜਾ ਵਿਚਾਰ ਕੀਤਾ ਇਹਦੇ ਨਾਲ ਹੋਈ ਹੈ ਉਹਦੇ ਨਾਲ ਬੁੱਤ ਬਦਲ ਕੇ ਬੁੱਤ ਹੋ ਗਈ ਬੁਵੇਕ ਦਾ ਰੂਪ ਵਿਵੇਕ ਗੁੱਧ ਹੈ ਵਿਵੇਕ ਪੁੱਤਰ ਬੁਵੇਕ ਕੋਈ ਫਰਕ ਨਹੀਂ ਹੁੰਦਾ ਸਾਵੜਨ ਸਰਤੀ ਕਾਮਣੀ ਇਹ ਕੌਣ ਹੈ ਸਾਵੜਨ ਸਰਤੀ ਕਾਮਣੀ ਬੁਵੇਕ ਗੁੱਧੀ ਗੁਰਕੇ ਸ਼ਬਦ ਵਿਚਾਰ ਗੁਰਕੇ ਸ਼ਬਦ ਨੂੰ ਵਿਚਾਰ ਹੇਤ ਪਿਆਰ ਜਿਹਦਾ ਆਪਣੇ ਮੂਲ ਦੇ ਨਾਲ ਪਿਆਰ ਹੈ ਉਹ ਸਦਾ ਸਵਾਗੜੀ ਆਪਣੇ ਮੂਲ ਨਾਲ ਜਿਹਦਾ ਪਿਆਰ ਹੈ ਆਪਣੇ ਗੁਰਦੇਵ ਨਾਲ ਪਿਆਰ ਹੈ ਅਪਾਰ ਅਪਾਰ ਹੇਤ ਹੈ ਜਿਹਦਾ ਸਤ ਆਪਣੇ ਉਹ ਕੀ ਲੋੜ ਹੈ ਰੱਖਣ ਦੀ ਖਤਰਾ ਆਇਆ ਰੱਖਣ ਜਿਹਨੂੰ ਖਤਰਾ ਹੀ ਹੋਵੇ ਤੇ ਰੱਖੇ ਹਾਂਜੀ ਮਹੱਲਾ ਤੀਜਾ ਸਾਵਣ ਦੱਜੈ ਗੁਣ ਬਾਹਰੀ ਜਿਸ ਦੂਜੇ ਭਾਏ ਪਿਆਰ ਨਾਨਕ ਪਿਰ ਕੀ ਸਾਰ ਨਾ ਸਭ ਸ਼ਿੰਗਾਰ ਖੁਆਰ ਸਭ ਕੋ ਪੂਰਾ ਆਪੋ ਹੋਵੇ ਕਾਹਨਾ ਕੋ ਗੱਲ ਹੋਵੇ ਨਾ ਕਹੇ ਤਾਂ ਸਾਹਵੇਂ ਪਰ ਅੰਦਰ ਕੀ ਹੋਵੇ ਅੰਦਰ ਜਲਗੜੀ ਹੋਵੇ ਦੀ ਅੰਦਰ ਧੁਖਦੀ ਹੋਵੇ ਧੁਖੇ ਜਿਵੇਂ ਆਲੀ ਜਿਵੇਂ ਰੂੜੀ ਨੂੰ ਅੱਗ ਲੱਗੀ ਹੁੰਦੀ ਹੈ ਕੋਣ ਬਾਹਰੀ ਕੋਣਾਂ ਤੇ ਬਾਹਰੀ ਹੈ ਉਹ ਗੁਣ ਜਿਸ ਦੂਜੇ ਪਾਏ ਪਿਆਰ ਪਾਲ ਖਾ ਦਾ ਮਾਇਆ ਪਾਲ ਨੇ ਛੀਰ ਦੀ ਛਾਹ ਬਾਲੇ ਛੀਰ ਦੀ ਭੁੱਖ ਹੈ ਪਾਲ ਨੇ ਛੀਰ ਦਾ ਲੋੜਾ ਨੇ ਨਾਨਕ ਪਿਰ ਕੀ ਸਾਰ ਸਭ ਸ਼ਿੰਗਾਰ ਉਹ ਆਪਣੇ ਉੱਤੇ ਝਟਕੀ ਹੋ ਰੀ ਤੇ ਰੁਕੀ ਪਤਾ ਹੈ ਫਿਰ ਕੌਣ ਉਹਦਾ ਤਾਂ ਫਿਰ ਵਿਆਹ ਹੈ ਛੀਰ ਵਿਆਹ ਹੈ ਸਭ ਕੁਝ ਬਾਹਰ ਹੈ ਉਹਦਾ ਪਿਰ ਕੀ ਸਾਰ ਨਾ ਜਾਣ ਲਈ ਉਹ ਨਹੀਂ ਉਹ ਨਹੀਂ ਜਾਣ ਸਕੀ ਸਭ ਛੀਦਾ ਉਹ ਉਹਦਾ ਸਰਮਚਾਲਣ ਕੀਤਾ ਹੋਇਆ ਸਭ ਬਣਾ ਪਾਇਆ ਸਭ ਬੇਕਾਰ। ਸਿਕਾਰ ਹੁੰਦਾ ਜਿਹੜਾ ਬਾਹਰ ਬਣਾ ਪਾਇਆ। ਅਲੱਗ-ਅਲੱਗ ਮੱਤਾਂ ਦੇ ਅਲੱਗ-ਅਲੱਗ ਬਣਾ ਲੇ। ਇਹ ਸਭ ਬੇਕਾਰ ਹੈ ਉਹਦਾ। ਉਹਦਾ ਭੇਗ ਬਣਾਉਣਾ ਸਭ ਬੇਕਾਰ ਹੈ। ਭੇਗ ਆਹੋ। ਹਾਂਜੀ। ਕੌੜੀ ਸੱਚਾ ਅਲਖ ਭਿਓ ਅਠ ਨਾ ਪਤੀਜਈ ਇੱਕ ਗਾਵੈ ਰਾਗ ਪਰੀਆਂ ਰਾਗ ਨਾ ਭੀਜਈ ਅੱਜ ਅਲਖਾ ਭਿਓ ਨੂੰ ਸੱਚਾ ਉਹਦਾ ਅਲੱਖਾ ਦੀਦਾ ਨਹੀਂ ਅਖਰੂ ਉਹ ਪਿਓ ਹੈ ਤੇ ਬਾਬਰੀ ਹੈ ਉਹਦੇ ਵਿੱਚ ਕੋਈ ਹੱਠ ਨਾ ਭਤੀਜੀ ਹੱਠ ਕਰਦਾ ਤੁਹਾਡੇ ਤੇ ਅੱਖਾਂ ਹੱਠੀਓ ਕਰਦੇ ਨੇ ਲੋ ਸਾਰੇ ਹੱਠ ਨੂੰ ਕੋਈ ਫਤਿਹ ਦਾ ਨੇ ਹਾਠੀਓ ਗਿਆ ਨੂੰ ਮੂਰਖ ਬੰਦੇ ਹੱਠ ਆਕ ਕਰਨ ਵਾਲਾ ਤਾਂ ਮੂਰਖ ਹੁੰਦਾ ਜਿੰਨਾ ਮੂਰਖ ਨੇ ਸਭ ਹੱਠ ਇੱਕ ਕਹਾਵਾਂ ਰਾਗ ਪਰੀਆਂ ਤੇ ਕਰਾਗੀ ਨੇ ਜਿਹੜੇ ਸਾਡੇ ਇਰਦ ਕਰਦੇ ਨੇ ਰਾਗਣੀਆ ਪਰੀਆਂ ਆ ਗਈਆਂ ਰਾਗਣੀਓ ਪਰੀਆਂ ਕਹਿੰਦੇ ਨਾਲ ਰਾਗਣੀਓ ਰਾਗਿਆ ਪਰੀਆਂ ਨੇ ਰਾਗਣੀਓ ਰਾਗ ਨਾਲ ਪਈ ਸੀ ਰਾਗ ਰਾਣੀਓ ਪਈਦਾ ਹੈਗਾ ਗੁਰਦਾਰੇ ਕੀਰਤਨ ਕਿੱਥੇ ਗਏ ਤਰ੍ਹਾਂ ਤਰ੍ਹਾਂ ਦੇ ਜਿਹੜੇ ਲਿਆਉਂਦੇ ਨੇ ਸਰਜਾਂ ਛੱਡ ਕੇ ਇਹ ਨਹੀਂ ਸੀ ਲੋੜ ਇਸ ਗੱਲ ਦੀ ਕੁਰਬਾਨੀ ਕੀ ਕਹਿੰਦੀ ਹੈ ਰਾਗ ਤਾਂ ਸਿਰਫ ਸਿਰਫ ਦੇ ਵਿੱਚ ਦਵਾਈ-ਫਾਈ ਹੁੰਦੀ ਹੈ ਕੰਮ ਤਾਂ ਦਵਾਈ ਦੇ ਨਾਲ ਉਹਦੀ ਮਿਠਾਸ ਨੇ ਥੋੜੀ ਕਰਨਾ ਉਹ ਤਾਂ ਉਹ ਪਾਈ ਵੀ ਖਾ ਲਵੇ ਕੋਈ ਇਹਨਾਂ ਨੇ ਜੋ ਰਾਗ ਤੇ ਹੀ ਦੇ ਦਿੱਤਾ ਸਾਰਾ ਰਾਗ ਦੇ ਵਿੱਚ ਜੋ ਪਾਇਆ ਹੋਇਆ ਹੈ ਦਵਾਈ ਹੈ ਉਹ ਮੇਰੀ ਉਹ ਅਚਨ ਰਾਗ ਨਾਲ ਹੀ ਪੈ ਜਾਂਦਾ ਹਾਂ ਰਾਗ ਦੀ ਨਾਲ ਪੈਜੀ ਰਾਗ ਨਾਲ ਰਾਗਦਾਰ ਨਾਲ ਨਹੀਂ ਪੈ ਜਾਂਦਾ ਉਹ ਜਿਹਨਾਂ ਵਰਗੀ ਕੀਰਤਨ ਕਰੇਗਾ ਜਿਹਦੀ ਜਿਹਨੇ ਵਰਗੀ ਵਾਜ ਹੋਵੇ ਤੇਰੀ ਉਹ ਕੋਈ ਫਰਕ ਨਹੀਂ ਪੈਂਦਾ ਅਜ ਸੰਸਾਰ ਤੇ ਅਸਰ ਬਹੁਤ ਸਰਕਾਰੀ ਧਰਮ ਨਹੀਂ ਦਾਬਲੀ ਮਿਲਦਾ ਉਹਨਾਂ ਨੂੰ ਦਾਬ ਦੀ ਭੁੱਖ ਵੀ ਹੈ ਇਹਨਾਂ ਲੱਗੀਆਂ ਦੂ ਹਾਂਜੀ ਇੱਕ ਨੱਚ ਨੱਚ ਪੂਰੇ ਤਾਲ ਭਗਤੀ ਨਾ ਕੀਜੀਈ ਇੱਕ ਅੰਨ ਨਾ ਖਾਏ ਮੂਰਖ ਤੇ ਨਾ ਕਿਆ ਕੀਜੀਈ ਜਿਹੜਾ ਲੱਜਦੇ ਨਾ ਦੇਵੀਆਂ ਦੇ ਮੂਹਰੇ ਥਾਲ ਪੂਰਦੇ ਨੇ ਵਾਇਦ ਕੇਲੇ ਰਚਣ ਕੋ ਪੈਰ ਹਲਾਉਣ ਫੇਰਨ ਫਿਰ ਉਹ ਭਗਤੀ ਨਹੀਂ ਕਰਦੇ ਮੈਂ ਕਿਤੇ ਭਗਤ ਕਿੱਥੇ ਕਰਦੇ ਨੇ ਥਾਲ ਨਾਲ ਜੁੜੇ ਹੋਏ ਨੇ ਉਹ ਟੋਲ ਕਨ ਉਹ ਕਿੱਥੇ ਜੁੜੇ ਦਾ ਬਾਹਰ ਹੋਏ ਨੇ ਇਹ ਅੰਨ ਨਾ ਖਾਵੇ ਮੂਰਖ ਜਿਹੜੇ ਅੱਗ ਛੱਡ ਦਿੰਦੇ ਨੇ ਉਹਨਾਂ ਨੂੰ ਮੂਰਖ ਕਹਿੰਦੇ ਅਨਨਖਾਂਏ ਬੋਰਖੋ ਤਨਾ ਕਿਆ ਜੀ ਉਹਨਾਂ ਨੇ ਕਰਨਾ ਚਾਹੀਦਾ ਜਿਹੜੇ ਅੱਡੇ ਨਹੀਂ ਖਾਂਦੇ ਇਹ ਵੀ ਨਹੀਂ ਕਰ ਦਾ ਵਰਤ ਰੱਖਣਾ ਗੁਰਮਤ ਵਿੱਚ ਪਰਵਾਹ ਨਹੀਂ ਹੈ ਜੀ ਬਿਲਕੁਲ ਨਹੀਂ ਛੱਡ ਦੇਣਾ ਜਿਹੜਾ ਹੈਗਾ ਉਹ ਤਾਂ ਖਾਂਦੇ ਹੀ ਨਹੀਂ ਛੱਡ ਕੇ ਸਬਜ਼ੀਆਂ ਸਬਜ਼ੀਆਂ ਨਾਲ ਲੱਗ ਜਾਂਦੇ ਨੇ ਇਹ ਜਿਹੜਾ ਵਰਤ ਰੱਖਣਾ ਚਾਹ ਇਹ ਤਾਂ ਆਮ ਵੀ ਆਦਮੀ ਜੇ ਰੱਖ ਲਵੇ ਵਰਤਨਾ ਨਹੀਂ ਉਹ ਕਿਸੇ ਦਾ ਡੰਗ ਵੱਟਦਾ ਨਾ ਖਾਵੇ ਸਮਝ ਸਰੀਰ ਠੀਕ ਹੋ ਜਾਂਦਾ ਜੇ ਕਿਸੇ ਨੂੰ ਬਹੁਤ ਇਹ ਗੁਰਮਤਿ ਭਗਤੀ ਕੋਈ ਫਾਇਦਾ ਨਹੀਂ ਜਰੀਰ ਵਾਸਤੇ ਠੀਕ ਹੋ ਸਕਦੀ ਸਹੀ ਬਾਤ ਆਤਮਾ ਦੀ ਤਰੱਕੀ ਨਹੀਂ ਹੋ ਸਕਦੀ ਉਹਦੇ ਚ ਪ੍ਰਕਾਸ਼ ਨਹੀਂ ਹੋ ਸਕਦਾ ਇਹਦੇ ਨਾਲ ਠੀਕ ਹੈ ਜੀ ਬਾਹਲਾ ਸਰੀਰ ਜ਼ਰੂਰ ਤੰਦਰੁਸਤ ਰਹਿ ਸਕਦਾ ਹਾਂ ਤ੍ਰਿਸ਼ਨਾ ਹੋਈ ਬਹੁਤ ਕਿਵੇਂ ਨਾ ਧੀਜਈ ਕਰਮ ਵਧੈ ਕਹਿ ਲੋ ਖੱਪ ਮਰੀ ਜਈ ਆਹ ਤ੍ਰਿਸ਼ਨਾ ਬਹੁਤ ਵੱਧ ਗਈ ਵੱਡੀ ਹੋਈ ਹੈ ਧੀਰੀ ਹੁੰਦੀ ਤੇ ਧੀਰੀ ਦੀ ਹੁੰਦੀ ਅੱਖ ਮੱਖੀ ਨਹੀਂ ਵਾਰ ਆਉਂਦਾ ਸ਼ਬਦ ਧੀਜਈ ਧੀਰਜ ਨਹੀਂ ਆਉਂਦਾ ਸਮਝ ਲਓ ਤੇਜ ਚਲਾਇ ਮਨ ਉਹ ਤ੍ਰਿਸ਼ਨਾ ਕਹਿੰਦੇ ਬਹੁਤ ਤ੍ਰਿਸ਼ਨਾ ਹੋ ਜਾ ਜ਼ਿਆਦਾ ਚਲਾਇਮਾਨ ਮਨ ਹੋ ਜਾਂਦਾ ਉਹ ਧੀਰਜ ਜਿੱਦੀ ਕਰਦਾ ਹੌਲੀ ਨਹੀਂ ਚੱਲਦਾ ਫਿਰ ਧੀਰਜ ਵਾਸਤੇ ਆਇਆ ਹੈ ਹਾਂਜੀ ਕਰਦਾ ਭਰੋਸਾ ਨਹੀਂ ਕਰਦਾ ਵੀ ਜਿਹੜਾ ਪਰਮੇਸ਼ਰ ਭਰੋਸਾ ਨਹੀਂ ਕਰਦਾ ਵੀ ਆਪ ਤੇ ਦਊਗਾ ਧੀਜੇ ਵੀ ਸ਼ਬਦ ਆਉਂਦਾ ਹੈ ਬਾਜ ਇੱਕ ਤਿਲ ਰਹਿਣਾ ਸਾਕਾਂ ਕਹਿਣ ਸੁਣਨਾ ਧੀਜੇ ਨਾਨਕ ਪ੍ਰਿਯੋ ਪ੍ਰੇਮ ਕਰ ਪੁਕਾਰੇ ਰਸਨ ਰਸ ਮਨ ਪੀਜੇ ਧੀਰਜ ਦੀ ਸਾਇੰਸ ਵਿੱਚ ਠੀਕ ਹੈ ਜੀ ਉਹ ਜਿਹੜਾ ਸ਼ਬਦ ਹੈ ਨਾ ਸਖਿਓ ਸਹਿਲੜਿਓ ਮੇਰਾ ਪਿਰ ਬਣ ਜਾਰਾ RAM ਉਹਦੇ ਵਿੱਚ ਆਉਂਦਾ ਹੈ ਠੀਕ ਹੈ ਤੀਰਜ ਵਾਸਤੇ ਆਉਂਦਾ ਹੈ ਜੀ ਆ ਰਿਹਾ ਠੀਕ ਹੈ ਕਰਮ ਬਦਐ ਕੈ ਲੋ ਖੱਪ ਉਹ ਕਰਮ ਬਦਲਣਾ ਚਾਹੀਦਾ ਸੀ ਗਿਆਨ ਬਦਲਣਾ ਚਾਹੀਦਾ ਸੀ ਕਰਮ ਤਾਂ ਬਹੁਤ ਬਦਾਲਿਆ ਕਾਰੋਬਾਰ ਤਾਂ ਬਹੁਤ ਬਦਾਲਿਆ ਗਿਆਨ ਬੁੱਧੀ ਦੇ ਵਿੱਚ ਰੋਸ਼ਨੀ ਦੀ ਵਧਾਈ ਕੱਪ ਕਾਂਸੇ ਮਰੀ ਜਾਂਦਾ ਹੈ ਕੱਪ ਦੇ ਵਿੱਚ ਪੱਜਿਆ ਫਿਰਿਆ ਤੇ ਸਾਰਾ ਦਿਨ ਅੰਦਰ ਚੱਲਣਾ ਰੋਸ਼ਨੀ ਨਹੀਂ ਵਧਾਈ ਕਰਮ ਲੋਕਾਂ ਚ ਮੇਰਾ شمار ਹੋ ਜਵੇ ਭਰਮ ਵਧਾ ਲਿਆ ਦੁਨੀਆ ਦੀਆਂ ਬਿੜਹਾਈਆਂ ਤੇ ਪੈ ਗਿਆ ਸਭਾਈ ਜਾਂ ਜਾਂ ਫਿਰਦਾ ਇੰਦਰ ਵੀ ਕੰਮ ਆ ਦੁਨੀਆ ਪਰਦੇ ਵਿੱਚ ਕੱਪ ਬਹੁਤ ਵੱਡੇ ਵੱਡੇ ਬਣਾ ਲੈ ਇਹ ਕੁਟਕੜਦਲ ਬੇਲ ਨਹੀਂ ਹੈ ਤਰੀ ਐ ਫਕੀਰ ਪਤਾ ਵੀ ਇਹਦੇ ਜੇ ਤਾਂ ਕੁਝ ਵੀ ਨਹੀਂ ਤੇਰੇ ਨਾਲ ਜਾਨ ਲੋਕ ਕਿਉਂ ਆਇਆ ਕਰਮ ਵਿਧਾਇ ਕਹਿ ਲੋ ਉਹ ਕਰਮ ਵਧਾਉਣਾ ਵਧਾਉਣਾ ਸੀ ਆਪਣਾ ਅੱਛਾ ਸਭ ਕੇ ਮਰੀ ਜਾਂਦੇ ਇਹ ਤਾਂ ਹਮ ਸਵਾਲ ਹੈ ਠੀਕ ਹੈ ਕਰਮ ਵਿਧਾਇ ਕਹਿ ਲੋ ਕੀ ਲੋ ਸੀ ਪਰ ਕਰਮ ਵਧਾ ਲਿਆ ਜੀ ਖੱਪ ਮਰੀ ਜਈ ਗੱਲ ਪਾ ਲਿਆ ਸੰਸਾਰੀ ਜੰਗਾਲ ਪਾ ਲਿਆ ਅਕਲ ਜਿਹੜੀ ਸੀ ਅਕਲ ਬਦ ਉੜਿਓ ਉਧਰ ਰਹਿ ਗਈ ਠੀਕ ਹੈ ਖੱਪੀ ਮਰੀ ਜਈ ਕਪ ਕਪ ਕੇ ਮਰ ਰਿਹਾ ਹੈ ਜੀ ਹਾਂ ਜਈ ਹਰ ਭਗਤੀ ਅਸਨੇਹ ਗੁਰਮੁਖੀ ਚੀ ਜਈ ਸਾਡੀ ਇਸੀ ਸੰਸਾਰ ਚ ਸਾਡਾ ਕਾਰੋਬਾਰ ਇਹ ਨਾ ਲਿਆ ਉਹਨੂੰ ਲਾਹਾ ਕਹਿੰਦੇ ਨਾ ਨਾਮ ਦਾ ਸੀ ਸੰਸਾਰ ਅੰਮ੍ਰਿਤ ਜੇ ਗਿਆਨ ਉਪਰਤ ਪੀਤਾ ਫੇਰ ਤਾਂ ਦਲ ਬਣਦੀ ਸੀ ਕੁਝ ਫੇਰ ਤੇਰੇ ਅੰਦਰ ਚੱਲਣ ਵਾਢਾ ਔਰ ਤੂੰ ਤਾਂ ਸੰਗਤਾਂ ਦੂਹੇ ਇਲਾਹਾ ਮੁਨੇ ਬੈਠਾ ਲਾ ਰਾਮ ਸੰਸਾ ਚਾਰ ਦਾ ਇਲਾਹਾ ਜੀ ਅਮਰ ਦੇ ਪਿੰਡਾਂ ਤੋਂ ਆ ਗੁਰਬਾਣੀ ਨੂੰ ਵਿਚਾਰਦਾ ਤੇ ਗਿਆਨ ਪਰ ਪੀਦਾ ਹਰ ਸੰਕਤੀ ਹਰ ਭਗਤੀ ਅਸਦੇ ਹਰ ਭਗਤਾਂ ਨਾਲ ਭਗਤੀ ਬਹੁਤ ਚੱਲਣੀ ਭਗਤੀ ਭਰਤਣਾ ਹਰ ਕੇ ਭਗਤ ਦੇ ਨਾਲ ਫਿਰ ਪਿਆਰ ਹੁੰਦਾ ਗੁਰਮੁਖਾ ਨਾਲ ਪਿਆਰ ਹੁੰਦਾ ਗੁਰਮੁਖੀ ਕਿ ਜੀ ਗੁਰਮੁਖਾ ਨਾਲ ਫਿਰ ਮਨ ਜਿਹੜਾ ਹੈ ਵਿਝਦਾ ਇੱਕ ਵਿੱਚ ਪਹੁੰਦਾ ਗੁਰਮੁਖਾ ਨਾਲ ਇੱਕ ਬਿਖੋ ਕੇ ਰਹਿੰਦਾ ਕੀ ਖਿਚੜੀ ਜਿਵੇਂ ਕਹਿੰਦੇ ਨੇ ਕੀ ਖਿਚੜੀ ਹੋ ਕੇ ਰਹਿੰਦਾ ਅੱਛਾ ਨਾਲ ਕੀ ਖਿਚੜੀ ਵਾਂਗੂ ਰਹਿੰਦਾ ਇੱਥੇ 17ਵੀਂ ਪੌੜੀ ਦੀ ਸਮਾਪਤੀ ਹੈ ਜੀ ਹਾਂ ਜੀ